ਲੋਕ ਮਹੱਲਾ ਚੌਥਾ ਰਾਮ ਨਾਮ ਰਮ ਰਵ ਰਹੇ ਰਾਮ ਰਾਮੋ RAM ਰਮੀਤ ਕਟਕਟਿ ਆਤਮ RAM ਹੈ ਪ੍ਰਭ ਖੇਲ ਕੀਓ ਰੰਗ ਰੀਤ ਆਤਮ ਰਾਮ ਕਿੱਥੇ ਹੈ ਪਿਛਲੀ ਪੰਕਤੀ ਹੈ ਕਟਕਟ ਆਤਮ ਰਾਮ ਹੈ ਉਹ ਆਤਮ RAM ਹੈ ਜਿਹੜਾ ਆਤਮ ਹੀ RAM ਹੈ ਉਹ ਵੀ RAM ਹੈ ਤੇਰਾ ਆਤਮ ਹੀ RAM ਹੈ ਤੇਰਾ ਬੂਲ ਹੀ RAM ਹੈ RAM ਨਾਮ ਰਬ RAM ਰਬ ਦੇ ਵਿੱਚ ਰਬ ਜਾ RAM ਦਾ ਜਿਹੜਾ ਗਿਆਨ ਹੈ ਉਹ ਲੈ ਕੇ ਉਹਦੇ ਵਿੱਚ ਹੀ ਸਮਾ ਜਾ ਤੂੰ ਉਹ ਰੋਸ਼ਨੀ ਦੇ ਵਿੱਚ ਹੀ ਰਹਿ ਰਬ ਰਵ ਜਿਹੜੇ RAM ਨਾਮ ਦੇ ਵਿੱਚ ਰਬ ਕੇ ਰਬ ਰਹਿੰਦੇ ਨੇ ਰਬ RAM RAM ਰਬੀਤ RAM ਦੇ ਵਿੱਚ ਹੀ ਸਮਾ ਜਾਂਦੇ ਨੇ ਉਹ ਰਬੀਤੇ ਹੋ ਜਾਂਦੇ ਨੇ ਹੀ ਰਹਿੰਦੇ ਨੇ ਰਾਮ ਰਾਮੋ ਰਾਮ ਦੇ ਵਿੱਚ ਰੰਮ ਕੇ ਰਾਮ ਰਮੀਤ ਬਣ ਜਾਂਦੇ ਨੇ ਰਾਮ ਵਾਲੋ ਇੱਕੋ ਹੀ ਹੋ ਜਾਂਦੇ ਦੋਏ ਬੀਤ ਹੋ ਜਾਂਦੇ ਨੇ ਇੱਕ ਹੋ ਜਾਂਦੇ ਨੇ ਦੋਏ ਰਾਮ ਦਾ ਰਾਮੀਤ ਉਹਦਾ ਉਹਦਾ ਬੀਤ ਸੁਣ ਵੀ ਤਾ ਨਾਨਕ ਹੋ ਜਾਂਦਾ ਪਿਆਰਾ ਹੋ ਜਾਂਦਾ ਫਿਰ ਇੱਕ ਹੋ ਜਾਂਦੇ ਨੇ ਉਹ ਕਟਕਟ ਆਤਮ ਰਾਮ ਸਾਰਿਆਂ ਦੇ ਅੰਦਰ ਰਾਮ ਤਾਂ ਸਾਰੇ ਸਕਦੇ ਨੇ ਜੇ ਰਭਣਾ ਚਾਹਦੇ ਹੋ ਪ੍ਰਭ ਖੇਲ ਕੀਓ रंग रीत राम रीता प्रभुदा खेल है बाहर जेड़ा हैगा जेड़ा बाहरला खेल है शरीर बनाया हुआ है, है ए ता राम हैगा रूप रंग है, रूप रेखा ए खेल है खेल औदा एदी हैगा राम वाह वाह हर स्वामी हर, हर प्रभु तिन मिले जिन लिखिया तुर हर प्रीत ਅੰਮ੍ਰਿਤ ਵਸੇ ਜਗ ਜੀਵਨਾ ਉਹ ਜਗ ਜੀਵਨਾ ਆਰਾਮ ਹੈ ਜਿਹੜਾ ਨੇੜੇ ਹੀ ਵਸਦਾ ਦੂਰ ਦੀਆਂ ਘਾਤ ਰਿਹਾ ਨਾਲੇ ਉਹ ਤਾਂ ਅਸੀਂ ਬਾਹਰ ਨੂੰ ਝਾਕਦੇ ਹਾਂ ਅੰਦਰ ਦੇ ਵਿੱਚ ਇਹ ਬਾਹਰ ਨੂੰ ਝਾਕਦਾ ਕਰਕੇ ਰੂਹੀ ਪਦੀਨ ਦੇਖਦਾ ਨਹੀਂ ਤਾਂ ਇਹਨੂੰ ਕੋਈ ਤਾਂ ਲੱਗਦਾ ਬਾਹਰੋਂ ਖੋਜਦਾ ਹੈ ਧਰਮ ਦੇ ਵਿੱਚ ਪ੍ਰਗਾਸ ਕੀਓ ਗੁਰਬੀਤ ਗੁਰਬੀਤ ਜਿਹੜਾ ਗੋਰਾ ਹੈ ਸਭ ਦਾ ਬੀਤ ਹੈ ਜਿਹੜਾ ਗੁਰ ਸਭ ਦਾ ਭਲ ਕਲਣਾ ਚਾਹੁੰਦਾ ਸਭ ਨੂੰ ਆਪਣਾ ਸਮਝਦਾ ਸਾਰਿਆਂ ਨੂੰ ਬਰਾਬਰ ਸਮਝਦਾ ਇੱਕ ਪਿਤਾ ਇੱਕ ਜਿਹੜਾ ਐਸਾ ਗੁਰ ਹੈ ਨਾ ਕੋਈ ਸਤ ਉਹ ਉਹ ਪਾਉਂਦਾ ਇਸ ਗੱਲ ਤੇ ਦੂਵੇ ਤਾਂ ਕੁਝ ਹੋਰ ਹੀ ਦੱਸਦੇ ਰਹਿੰ ਬਾਕੀ ਉਹ ਬੀਤ ਨਹੀਂ ਆ ਨਸਨ ਦੇ ਵਿੱਚ ਡੋਬਣ ਵਾਲੇ ਨੇ ਇਹ ਵਿੱਚ ਪਹੁੰਚਾਉਣ ਵਾਲਾ ਇਹਨੂੰ ਚਿੰਤਾ ਸਭ ਦੀ ਸਭ ਵੱਜਣ ਕਿਸੇ ਦਾ ਜਨਮ ਆਕਾਰ ਥਾਂ ਜਾਵੇ ਹੈ ਨਾ ਸਭ ਦਾ ਇਹ ਹਰ ਪ੍ਰਭੂ ਜਿਹੜਾ ਹੈ ਸੋਭੀ ਹੈ ਹੈ ਜਿਨ੍ਹਾਂ ਨੇ ਲਿਖਿਆ ਤੁਰ ਹਰ ਪ੍ਰੀਤ ਜਿਨ੍ਹਾਂ ਨੇ ਪ੍ਰੇਮ ਨਾਲ ਦਾ ਪਰਪਰ ਬੰਧਿਆ ਹੋਇਆ ਹੈ ਲੋ ਜਿਨ੍ਹਾਂ ਦਾ ਪ੍ਰੇਮ ਉਹਦੇ ਨਾਲ ਪ੍ਰੇਮ ਹੈ ਅਰ ਨੂੰ ਮਿਲ ਜਾਂਦਾ ਪ੍ਰੀਤ ਉਹਨਾਂ ਦੀ ਜਿਨ੍ਹਾਂ ਦੇ ਪ੍ਰੀਤ ਹੈ ਉਹ ਫਿਰ ਲਿਖਿਆ ਹੈ ਇਹ ਲਿਖਿਆ ਪ੍ਰੀਤ ਇਹ ਲਿਖਿਆ ਹੋਇਆ ਹੈ ਪ੍ਰੀਤ ਆ ਉਹ ਪ੍ਰੀਤ ਦਾ ਨਾਮ ਹੀ ਲਿਖਿਆ ਹੋਇਆ ਹੈ ਹੋਰ ਕੀ ਲਿਖਿਆ ਹੋਇਆ ਜਿਹੜਾ ਵਿਸ਼ਵਾਸ ਹੈ ਇਹ ਲਿਖਿਆ ਹੋਇਆ ਇਹਨੂੰ ਇਹ ਲਿਖਿਆ ਕਹਿੰਦੇ ਨੇ ਹਾਂ ਜੀ ਜਨ ਨਾਨਕ ਨਾਮ ਧਿਆਇਆ ਗੁਰਬਚਨੀ ਜਪਿਓ ਮਨ ਚੀਤ ਨਾਨਕ ਜਿਹੜੇ ਉਹਦੇ ਜਾਨੇ ਨਾ ਉਹਦੇ ਹੋ ਕੇ ਰਹ ਜਾਂਦੇ ਨੇ ਉਹਨਾਂ ਨੇ ਉਹਦੇ ਵਿੱਚ ਪ੍ਰੀਤ ਹੁੰਦੀ ਹੈ ਪ੍ਰੇਮ ਹੁੰਦੀ ਹੈ ਪ੍ਰੇਮ ਦਾ ਆਪੇ ਪ੍ਰੇਮ ਦੇ ਧਿਆਨ ਆਪੇ ਰੰਦਾ ਗੁਰਬਚਨ ਜਪਿਓ ਮਨ ਚੀਤ ਜਿਹਨਾਂ ਨੇ ਗੁਰ ਆ ਗੁਰ ਬਾਣੀ ਕੇ ਗੁਰ ਨੂੰ ਸਮਝ ਕੇ ਜੇ ਆਨੇ ਜਿੱਤ ਵਿੱਚ ਜਨਨ ਦਾ ਉਦਮ ਕੀਤਾ ਖੋਜਣ ਦਾ ਉਦਮ ਕੀਤਾ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ ਉਹਨਾਂ ਨੂੰ ਸਮਝ ਆ ਜਾਂਦੀ ਹੈ ਉਹਨਾਂ ਦਾ ਧਿਆਨ ਜੁੜਿਆ ਰਹਿੰਦਾ ਮਹੱਲਾ ਚੌਥਾ ਹਰ ਪ੍ਰਭ ਸੱਜਣ ਲੋੜ ਲਾਓ ਭਾਗ ਵਸੈ ਵੱਡ ਭਾਗੀ ਗੁਰ ਪੂਰੈ ਦੇਖਾਲਿਆ ਨਾਨਕ ਹਰਲੇ ਬੁਲਾਗੇ ਹਰ ਪ੍ਰਭ ਸੱਜਣ ਲੋੜ ਲਓ ਜਿਹੜਾ ਹਰਪ੍ਰਭ ਹੈ ਸੱਜਣ ਹੈਗਾ ਉਹ ਸਭ ਦਾ ਸੱਜਣ ਆਪਣਾ ਸੱਜਣ ਬਣਾ ਲਿਓ ਉਹਦੀ ਲੋੜ ਹੈ ਉਹਦੀ ਪ੍ਰਾਪਤੀ ਕਰੋ ਕਿ ਵੀ ਕਰੋ ਚਾਹੇ ਬਾਗ ਪਸੇ ਪੜ ਭਾਗ ਵੱਡੇ ਭਾਗ ਦਾ ਆਲਾ ਹੋ ਕੇ ਬਸ ਜੇਗਾ ਜੇ ਤੈਨੂੰ ਮਿਲ ਗਿਆ ਗੁਰਪੁਰ ਦੇਖ ਆ ਨਾਨਕ ਹਰ ਲਾਜ ਗੁਰ ਪੂਰੇ ਗਿਆਨ ਦੀ ਨਾਲ ਕੋ ਪੂਰਾ ਗੁਰੂ ਪੂਰਾ ਕੋਈ ਸਤਿਗੁਰੂ ਤਾਂ ਪੂਰੀ ਬੱਤ ਵਾਲਾ ਉਹਨੇ ਤਾਂ ਖਾਲਤਾ ਅਨਰੋਧ ਖਾੜ ਸਕਦਾ ਉਹਨੇ ਦਿਖਾ ਲਿਆ ਉਹਨੂੰ ਲੱਭ ਲੋ ਕਿਤੋਂ ਦੇ ਖਾਲਿਆ ਨਾਨਕ ਦੇਖ ਲੈਂਦਾ ਫਿਰ ਲੱਗ ਜਾਂਦੀ ਜੇ ਫਿਰ ਵੀ ਉਹਦੇ ਨਾਲ ਜੁੜਿਆ ਜਾਂਦਾ ਜੇ ਕਹਿੰਦੇ ਬਿਨਾਂ ਲੱਭ ਨਹੀਂ ਲੱਗਦੀ ਸਮਝੇ ਤੇ ਬਿਨਾਂ ਲੱਭ ਨਹੀਂ ਲੱਗਦੀ ਸਮਝਣਾ ਹੀ ਦੇਖਣਾ ਹਾਂਜੀ ਔੜੀ ਤਨ ਤਨ ਸੁਹਾਵੀ ਸਫਲ ਘੜੀ ਜਿਤ ਹਰ ਸੇਵਾ ਮਨ ਬਾਣੀ ਹਰ ਕਥਾ ਸੁਣਾਵੋ ਮੇਰੇ ਗੁਰ ਸਿੱਖੋ ਮੇਰੇ ਹਰ ਪ੍ਰਭ ਇਕੱਠ ਪਹਾਣੀ ਤੁਨ ਤੁਨ ਸੁਹਾਵੀ ਸਫਲ ਘੜੀ ਉਹ ਸੁਹਾਵੀ ਸੁਖ ਦੇਣ ਵਾਲੀ ਘੜੀ ਹੈ ਜਿਹੜੀ ਸਫਲ ਹੋਈ ਹੈ ਜਦੋਂ ਸਫਲਤਾ ਪ੍ਰਾਪਤ ਮਿਲੀ ਹੈ ਦਰਸ਼ਨ ਕਰਨ ਤੇ ਸੁਭ ਜਣ ਤੇ ਇਦਾਂ ਲੱਗਣ ਤੇ ਧੰਨ ਧੰਨ ਜਿੱਤ ਹਰ ਸੇਵਾ ਮਨ ਪਾੜੀ ਜਦੋਂ ਆਹ ਦੀ ਸੇਵਾ ਚ ਕੀ ਲੱਗੀ ਹੈ ਜਿੱਦਾਂ ਜਿੱਦਾਂ ਫੈਸਲਾ ਕਰ ਲਿਆ ਕਿ ਇੱਧਰ ਸ਼ਬਦ ਵਿਚਾਰ ਚ ਜੁੜੇ ਹੀ ਰਹਿਣਾ ਜੁੜਨਾ ਸਾਨੂੰ ਇਹਦੇ ਚ ਬਹੁਤ ਲਾਹਾ ਹੈ ਇਹੀ ਸਾਡਾ ਟਾਰਗੇਟ ਹੈ ਜ਼ਿੰਦਗੀ ਦਾ ਤੇ ਉਹ ਜਦੋਂ ਫੈਸਲਾ ਪੱਕਾ ਕਰ ਲਿਆ ਉਹ ਜਿਹੜੀ ਘੜੀ ਸੀ ਉਹ ਬੜੀ ਭਾਗ ਵਾਲੀ ਘੜੀ ਸੀ ਹਰ ਕਥਾ ਸੁਣਾ ਸੁਣਾਓ ਬਰੇ ਗੁਰ ਸਿੱਖੋ मेरे हर अक्का अकथ कहानी हर दी कथा सुनावो मेरे गुरु से मेरे हरप्रभु दी अक्का कथा कहानी मेरे हरप्रभु दी अक्का कथा कहानी ओ सुनाओ कोई सुनो ते ओही क्यों पाई है क्यों देखी है मेरा हर हरप्रभु सुगड सुजाणी हर मेल दिखाए आप हर गुरबचनी नाम समाणी हर दी हरप्रभु दी ਹੋਰ ਮਤਾਵਿਚ ਵੀ ਚਲਦੀ ਹੈ ਹੈਨਾ ਦੂਜੀ ਵਸਤੂ ਵੀ ਉਹ ਚਲਦੀ ਹੈ ਬਾਹਰ ਪਰ ਉਥੇ ਆ ਸਵਾਲ ਨਹੀਂ ਹੈਗਾ ਕਿਉਂ ਪਾਈ ਹੈ ਕਿਵੇਂ ਪ੍ਰਾਪਤੀ ਹੋਊਗੀ ਕਿਉਂ ਦੇਖੀਏ ਹਾਲਾਂਕਿ ਕਾਨੂੰਨੀ ਨਹੀਂ ਨਾ ਮੇਂ ਜਿਆਦਤਰ ਤਾਂ ਪੜੇ ਬੁੱਧੀ ਤੋਂ ਵੀ ਪੜੇ ਫਿਰ ਵੀ ਕਿਵੇਂ ਦੇਖ ਦੇ ਗੰਦੀ ਗੱਲ ਦੀ ਹੈ ਹਾਲਾਂਕਿ ਦੇਖਿਆ ਵੀ ਨਹੀਂ ਜਾ ਸਕਦਾ ਖਾਨਾ ਮੇਰਾ ਹਰਪ੍ਰਭ ਤੁੰਗੜ ਸੁਜਾਨ ਮੇਰਾ ਹਰਪ੍ਰਭ ਸੁਗੜ ਸੁਜਾਨ ਤੂੰ ਜਾਣੀ ਜਿਹੜਾ ਸਭ ਕੁਝ ਜਾਣਦਾ ਹੈ ਉਹਦਾ ਦਰਸ਼ਨ ਕਿਵੇਂ ਹੋਵੇ ਤੇ ਉਹਨੂੰ ਜਾਣਿਆ ਕਿਵੇਂ ਜਾਵੇ ਪ੍ਰਾਪਤੀ ਕਿਵੇਂ ਹੋਵੇ ਬਾਹਲਾ ਦਾ ਬਾਹਲਾ ਦਾ ਸਭ ਦਾ ਹੀ ਹੁੰਦਾ ਤਾਂ ਹੀ ਮੇਰਾ ਮੇਰਾ ਲਫ਼ਜ਼ ਹੁੰਦਾ ਨਾ ਆਪਣਾ ਆਪਣਾ ਸਭ ਦੇ ਅੰਦਰ ਹੀ ਹਰ ਆਪਣੇ ਨਾਲ ਮਿਲ ਕੇ ਆਪਣਾ ਆਪ ਹੀ ਦਿਖੂਦਾ ਜਿੰਨਾ ਜਦੋਂ ਮਿਲਦਾ ਨਹੀਂ ਤਾਂ ਵਿਹਦਾ ਬਈ ਹੈ ਇਹ ਹਲ ਦਿਖਾਏ ਆਪ ਹਰ ਆਪਣਾ ਆਪ ਆਪਣਾ ਪਰਿਆ ਇੱਕ ਇੱਕ ਦਾ ਦਰਸ਼ਨ ਫੇਰ ਹੁੰਦਾ ਦੋ ਅਮਲ ਕੇ ਇਕਦਾਂ ਹਾਲਾਂ ਮਿਲ ਕੇ ਹੀ ਇੱਕ ਦਾ ਦਰਸ਼ਨ ਹੁੰਦਾ ਕਹਿਣਾ ਮਤਲਬ ਇਹ ਹੈ ਗੁਰਬਚਨੀ ਨਾਮ ਸੁਬਾਣੀ ਅੱਲੇ ਗੁਰਬੇ ਬਚਨ ਨੇ ਗੁਰਬਾਣੀ ਇਹਦੇ ਨਾਲ ਨਾਮ ਦੇ ਵੀ ਜੁੜਾਇਆ ਜਾਂਦਾ ਹੈ ਹਾਂ ਜੀ ਨਾਨਕ ਵਾਰਿਆ ਜੋ ਜਪਦੇ ਹਰ ਨਿਰਵਾਣੀ ਆਹ ਨਾਨਕ ਵਿਟੋ ਵਾਰਿਆ ਨਾਂ ਕਹਿੰਦਾ ਬੈਣੋ ਤਾਂ ਜੋ ਜਪਦੇ ਹਰ ਨਿਰਵਾਣੀ ਜਿਹੜੇ ਹਰ ਨਿਰਵਾਣ ਨੂੰ ਜਪਦੇ ਨੇ ਨਿਰਵਾਣ ਤੋਂ ਵੀ ਬਾਹਰ ਹੋ ਬਾਤ। ਸਹਿਵਾਨ ਹੁੰਦਾ ਬਾਣੀ ਤੋਂ ਪਰੇ, ਬੋਲਣ ਤੋਂ ਪਰੇ। ਜੋ ਬਾਣੀ ਦੇ ਵਿੱਚ ਨਹੀਂ ਬੋਲਣ ਸੇ ਨਹੀਂ ਆ ਸਕਦਾ ਉਹ ਨਿਰਵਾਣੀ ਬੋਲਣ ਵਾਲੀ ਗੱਲ ਹੈ ਉਹ ਦੀ। ਬੋਲ ਕੇ ਦੱਸਦੇ ਬੁੱਝਣ ਵਾਲੀ ਗੱਲ ਰਹਿੰਦੀ। ਉਹ ਬੁੱਝਣ ਵਾਲੀ ਗੱਲ ਹੈ। ਜੇ ਬੁੱਝ ਲਿਆ ਉਹ ਨਿਰਵਾਣੀ ਹੈ ਫਿਰ। ਜੋ ਗੂੰਗੇ ਕੋਣ ਖਾਇਆ ਪੁੱਛੇ ਤਾਂ ਆ ਗਿਆ ਕਹੀਏ। ਮੈਨੇ ਗੋੜਤਾ ਖਾ ਲਿਆ। ਖਾਦਾ ਆ ਚੇ ਹੋ ਗਿਆ ਉਹ ਟੈਸਟ ਨਹੀਂ ਦੱਸ ਸਕਦਾ ਟੈਸਟ ਆ ਜਾਓ ਜਿਹੜਾ ਖਾਊਗਾ ਸਾਨੂੰ ਪਤਾ ਲੱਗੂਗਾ ਉਹ ਮਿਹਰਬਾਨੀ ਹੈ ਇਹ ਸੋਦਾ ਸਵਾਲ ਮਿਹਰਬਾਨੀ ਉਹਦੀ ਦੱਸਿਆ ਜਾ ਸਕਦਾ ਇੱਥੇ ਦਸਵੀਂ ਪੌੜੀ ਦੀ ਸਮਾਪਤੀ ਹੈ ਜੀ ਹਾਂ ਜੀ